ਸੋਇਨਾ ਰੂਪਾ ਸੰਚਿਏ ਤਨ ਕਾਚਾ ਵਿਖਸ਼ਾਰ ਛਾ ਸਦਾਏ ਸੰਚ ਧਨ ਦੁਗਦਾ ਹੋਏ ਖਾਰ ਸੋਨਾ ਰੂਪਾ ਸੰਚਿਏ ਸੋਨਾ ਚਾਂਦੀ ਲੋਕ ਇਕੱਠਾ ਕਰਦੇ ਨੇ ਜੀ ਕਾਚਾ ਵਿਖਸ਼ਾਰ ਕੱਟੇ ਕੰਪੀਰ ਮਾਰਨੇ ਸਾਰੇ ਗੁਰਦੁਆਰੇ ਵਿੱਚ ਕੱਟੇ ਸਾਰੇ ਗੁਰਦ੍ਰਮ ਵਿੱਚ ਸਾਰੇ ਸੰਸਾਰ ਚ ਇਸੇ ਦੀ ਕਿਹਾਇ ਜਾਈਦਾ ਹੈ ਗੁਰਬਾਣੀ ਆਪਣੀ ਜਗ੍ਹਾ ਜੋ ਮਰਜੀ ਕਹਿੰਦੀ ਹੋਵੇ ਐਕਚੁਅਲੀ ਗੱਲ ਹੈ ਗੁਰਬਾਣੀ ਤੋਂ ਵਿਰੋਧੀਓ ਗੱਲ ਚੱਲਦੀ ਇਸ ਗੱਲ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਸਾਯਾ ਮੋਹ हां जी शाह सदाए सच तन दुविधा होए खवार सच तन काह सदाए पर चालू के सुन सके शाह सदाए हां जी काश्या तन शाह बन जेबे कोई दुविधा होए खवार दुविधाज खवारे ਉਹ ਛੱਡਣ ਵੇਲੇ ਬੜਾ ਔਖਾ ਹੋਊਗਾ ਉਹ ਛੱਡਣਾ ਤਾਂ ਬਹੁਤ ਔਖਾ ਹੈ ਜਦ ਛੱਡ ਕੇ ਜਾਣਾ ਕੋਈ ਸੰਸਾਰ ਸੁੱਖ ਦਾ ਜੀਉ ਜਾਂਦਾ ਸੁਨਵਾ ਜਾਂਦਾ ਇਹ ਜੀਵ ਨੂੰ ਵੀ ਖੁਆਰ ਕਰਦਾ ਮਨ ਲੱਗੇ ਵੀ ਖੁਆਰ ਕਰਦਾ ਖੁਆਰੀ ਹੋ ਜਾਂਦੇ ਵਿੱਚ ਫਸੰਗਿਆਰੀ ਸੱਚੇ ਉਨੇ ਸੱਚ ਸੱਚ ਹੈ ਸੱਚੋ ਨਾਮ ਅਬੋਲ ਸੱਚਾ ਨਾਮ ਹੈ ਉਹੀ ਅਬੋਲ ਉਹਦਾ ਬੁੱਲੇ ਕੋਈ ਨਹੀਂ ਉਹ ਬਿਕਦਾ ਹੀ ਨਹੀਂ ਸੱਚ ਸੰਸਾਰ ਜਿੱਥੇ ਵੀ ਵਿਕਦਾ ਸਾਰ ਬਿਆਹ ਕਿਤੇ ਵੀ ਵਿਕਦੀ ਬਿਆਹ ਬਰੁਣਦੀ ਹੈ ਬਿਆਹ ਜੇ ਬਰੁਣਦੀ ਹੈ ਤਾਂ ਫਰੀ ਮਿਲਦੀ ਹੈ ਨਹੀਂ ਤਾਂ ਬਰਦੀ ਉਹਦੀ ਤੇਰਵਾ ਸਭ ਨੂੰ ਨਹੀਂ ਮਿਲਦੀ ਨਤਾ ਫਰੀਦ ਜੀ ਨੇ ਨ ਦੇ ਗੁਰੂ ਹੋਏ ਜੀ। ਚਕਿਆਰੀ ਦੀ ਸੰਕੀ ਤੁਹਾਨੂੰ ਸੰਕਿਆ ਉਹਨੇ। ਨਾ ਨਾ ਮੈਂ ਕੋਲ ਨੂੰ ਸੰਕਿਆ ਦੇ। ਅਬੋਲ ਹੂੰ। ਉਹ ਬੋਲ ਸੱਚ ਹੈ। ਸੱਚਿਆ। ਭਾਜੋ ਨਾ ਮ ਅਬੋਲ ਵਾਲਾ ਤਾਂ ਸੱਚਾ ਤਾਂ ਰੋਵੇ। ਆ ਤਾਂ ਨੂੰ ਗਿਆਨ। ਆ ਤਾਂ ਉਹਦੇ ਸਭੋ ਲੈ ਬਗਦਾ ਰਿਓ ਹਰ ਨਿਰਮਾਇਲ ਉਜਲੋ ਪਤ ਸਚ ਬੋਲ ਹਰ ਨਿਰਮਾਇਲ ਉਜਲੋ ਅੱਤ ਕਹਿ ਜਿਓ ਵੀ ਹੋ ਹਰ ਵਰ ਦਿਓ ਨਿਰਮਾਇਲ ਹੋ ਵੀ ਮੈਰੇ ਤਿੰਤਾ ਸੋ ਰਹੇ ਤੋਂ ਜੈ ਹੋਗੀ ਨਿਰਮਲ ਉਜਲੋ ਉਜਲੀ ਹੋਗੀ ਬਿਲਕੁਲ ਹੋਣੀ ਖੁਜਲੀ ਸੀ ਨਾ ਖੁਜਲੀ ਇਹਨੂੰ ਸਾਫ਼ ਕਰ ਨਾ ਏਲੀ ਉਹ ਖੱਡਣੀ ਧੋਤੀ ਕਰਦੇ ਨੇ ਉਹ ਤੇਲ ਨਾਲ ਖੜ ਲੱਗ ਜਾਂਦੀ ਹੈ ਕਹਿੰਦੇ ਖੱਡਣੀ ਧੋਤੀ ਵਰਗੀ ਬੁੱਤੀ ਸੀ ਖੁੱਬ ਚੜ ਗਈ ਖੁੱਬ ਉੱਜਲੋਂ ਫਾਟਾ ਫਾਟੀ ਫਾਟੀ ਬੋਲ ਸੱਚੀ ਜਿਹਦਾ ਸੰਸਾਰ ਦੇ ਵਿੱਚ ਇਸ ਕਰਕੇ ਹੈ ਤੇ ਹਰ ਬੋਲ ਦੇ ਵਿੱਚ ਸੱਚ ਹੈ। ਹੂੰ। ਵਿੱਦਿਆ ਸੱਚੀ ਹੈ, ਬੋਲ ਸੱਚੇ। ਗੱਲ ਵਾਹ ਹੈ। ਹਰ ਗੱਲ ਦੇ ਵਿੱਚ ਸੱਚ ਆ। ਹਾਂਜੀ। ਠੀਕ ਹੈ ਜੀ। ਸਾਜਨ ਮੀਤ ਸੁਜਾਨ ਤੂੰ ਤੂੰ ਸਰਵਰ ਤੂੰ ਹੰਸ। ਸਾਚੋਂ ਠਾਕੁਰ ਮਨ ਵਸੈ ਹਉ ਬਲਿਹਾਰੀ ਤਿਸ ਸਾਜਣ ਵੀਕ ਜਾਲੂ ਉਹੀ ਸੱਜਣ ਉਹੀ ਵੀਕਾਂ ਉਹ ਸੁਝਾਨ ਵੀ ਇਹ ਸਭ ਕੁਝ ਜੋੜਦੈ ਹੂੰ ਸਰਬਰ ਤੂੰ ਗਿਰਦ ਸਰਬਰ ਵੀ ਕੋਈਆਂ ਸੱਚੀ ਕੀ ਆਪਣੇ ਜੋੜ ਲੂ ਕੇ ਸੱਜਣ ਹੋਈ ਨੇ ਜਿਹੜੇ ਚਲਦਿਆਂ ਨਾਲ ਚੱਲਣ ਜਿਹੜਾ ਮੂਲ ਆ ਉਹਨੂੰ ਕਹ ਲਈਏ ਬੁੱਧੀ ਸਿਆਰੀ ਹੋਈ ਹੋਈ ਸਾਜਣੀ ਤੇ ਸਿਆਰਤੂੰ ਤੂੰ ਸਰਬਰ ਤੂੰ ਹੰਸ ਵੀ ਤੋਈ ਹੂੰ ਹੂੰ ਸਰਬਰ ਵੀ ਤੋਈ ਸਰਬਰ ਦਾ ਮਤਲਬ ਜਿੱਥੇ ਰਹਿੰਦੇ ਹਨ ਸੋ ਜਗ੍ਹਾ ਨੂੰ ਸਰਬਰ ਕਹਿੰਦੇ ਸਰੋਵਰ ਅਜਾ ਸਰੋਵਰ ਤੇ ਹੰਸ ਰਹਿੰਦਾ ਉਹ ਸਰਬਰ ਹੁੰਦਾ ਹੈ ਤੇ ਹੈ ਬਾਹਰ ਹੈ ਜੀ ਸਰਵਰੋਗ ਦੇ ਦਿੱਕਸ਼ਾ ਮਾਇਆ ਹੋਇ ਉਸ ਗੁਰੂ ਦੇ। ਹਾਂਜੀ। ਸਿ ਕਬਰਨਾ ਬਰੋਗ ਦੇ ਵਿੱਚ ਸੁਣਾਇਆ ਹੈ ਸਰਵਰ। ਕੋਈ ਗਾ ਜੀ। ਸਤਿਓ ਠਾਕੁਰ ਬਲਿਹਾਰੀ ਤਿਸ। ਵਸਦਾ ਬਲਿਹਾਰੀ। ਮਾਇਆ ਮਮਤਾ ਮੋਹਣੀ ਜਿਨ ਕੀਤੀ ਸੋ ਜਾਣ। ਵੇਖਿਆ ਅੰਮ੍ਰਿਤ ਏਕ ਹੈ ਬੂਝੈ ਪੁਰਖ ਸੁ ਜਾਣ ਮਾਇਆ ਬបਤਾ ਬੋਲੀ ਜੇ ਕੀਤੀ ਸੋ ਜਾਣ ਮਾਇਆ ਬបਤਾ ਬੋਲੀ ਜੀਨੇ ਬਣਾਈਆ ਆਪਣ ਨੂੰ ਜਾਣ ਲੈ ਮਾਇਆ ਬੋਲੀ ਰੂਣੀ ਜਾਣ ਇਹਦਾ ਕੀ ਜਾਣਦੇ ਜੀਨੇ ਬਣਾਈਆ ਉਹਨੂੰ ਜਾਣ ਲੈ ਬਣਾਉਣ ਵਾਲੇ ਨੂੰ ਜਾਣ ਲੈ ਵਾਲਾ ਆਪਣਾ ਯਾਰ ਗਟਾ ਜਾਣਦਾ ਠੀਕ ਕੀ ਕੀ ਸੋ ਜਾਣ ਕਿ ਖਿਆ ਇਹ ਤਾਂ ਗੁੱਝੇ ਕੋਰਸ ਜਿਹਾ ਹੋ ਗਿਓ ਅਈ ਬਖਿਆਣਾ ਹਾਂਜੀ ਅਈ ਅਬਰਤ ਨੇ ਛੱਤੀ ਛੱਤੀ ਅਬਰਤ ਦੇ ਬਖਿਆਈ ਨੇ ਜਿਹੜੇ ਜੇ ਤੱਕ ਆ ਸਰੀਰ ਬਖਿਆ ਤਾਂ ਇਹਦੀ ਖਰਾਬੀ ਬਖਿਆ ਹੈ ਤਾਂ ਅਸੀਂ ਇਹਨਾਂ ਨੂੰ ਅਬਰਤ ਕਹਿੰਦੇ ਆ ਪਰ ਬਖਿਆ ਦੇ ਅਬਰਤ ਕੀ ਬਣਦੇ ਹੋਏ ਪੂਰਨੂਪ ਦੀ ਮਾਇਆ ਦਖਿਆ ਮਾਇਆ ਦੀ ਹਰ ਚੀਜ਼ ਬੜੀ ਹੋਈ ਇਸ ਸੂਝਾਨ ਆਦਮੀ ਜਿਹੜੇ ਨੇ ਸਭੀ ਜ਼ਾਰ ਆਦਮੀ ਲੋਕ ਹੈ ਰੁਸਿਆ ਬੋਲਣਗੇ ਗੁਰਗਾਂਵੇ ਸਭ ਕੇ ਹਾਲਾਦੀ ਕਰਦੀ ਗੁਰਘਾਂਟਾ ਬੰਨਣ ਚ ਸ਼ਾਇਦ ਹੈ